ਫੇਰ ਵਸ ਆਇਆ ਫੇਰੁਆਣ ਸਤਗੁਰ ਖੜੂਰ ਤਪ ਸੰਜਮ ਨਾਤਿ ਘੋਰ ਮਚੀ ਗੁਰ ਲੋ ਤੇਰੇ ਫੇਰੂ ਦੇ ਆਲੇ ਨੂੰ ਔਕੜ ਹੈ ਜੀ ਫੇਰੂ ਦਾ ਇੱਕ ਵਜਨ ਬੁਰਖ ਬਾਜ ਗਾ ਅੱਛਾ ਜੀ ਫੇਰੂ ਅੱਛਾ ਜੀ ਹੌਣ ਜਾਣਦੇ ਜਿਵੇਂ ਜਬਰਵੰਦ ਦੇ ਚੱਕਰ ਸੀ ਇਹਦਾ ਹੈ ਅੱਛਾ ਜੀ ਤੇ ਵਸਾਇਆ ਤਾਂ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਫੇਰ ਵਸਾਇਆ ਦੁਆਰਾ ਵਸਾਇਆ ਤਾਂ ਫੇਰੂ ਜਿਹੜਾ ਸੀ ਰੀ ਅਵਾਜ਼ਾਂ ਡੰਪ ਪੱਜਿਆ ਫਿਰਦਾ ਸੀ ਜਬਰਵੰਦ ਦੀ ਆਵਾਜ਼ਾਂ ਦੇ ਵਿੱਚ ਸੀ ਸਤਗੁਰ ਖਾਡੂਰ ਖਾਡੂਰ ਦਾ ਮਤਲਬ ਹੈ ਖੱਡ ਹਾਂਜੀ ਅੱਛਾ ਘੋੜੇ ਹੈ ਬਣਾਵਾ ਥੋੜੇ ਛਾਲ ਨੂੰ ਦਾ ਦਿਸਤਾ ਵਾ ਕਬੀਰ ਨੇ ਕਹੀ ਸੀ ਇਹ ਗੱਲ ਅੱਛਾ ਜੀ ਘੋੜ ਦੇ ਕਹਦੇ ਨੇ ਅੱਛਾ ਜੀ ਫਰੀਦ ਇਹਨੂੰ ਕਹਿੰਦਾ ਗੌਰ ਢੰਗਾ ਵਾਸਾ ਗੌਰ ਸੁਖ ਅਸਲ ਦੇ ਵਿੱਚ ਵਸਾਤਾ ਟਕਾਤਾ ਅੱਛਾ ਜੀ ਹਾਂਜੀ ਖਾਡੂ ਰਜ ਖਾਡੂ ਰੂ ਰੂ ਰੂ ਦਾ ਅੱਛਾ ਜੀ 30 ਰੁਪਏ ਖਾਡੇ ਚ ਅੱਛਾ ਜੀ ਅੱਜ ਇਹਨਾਂ ਨੇ ਇਹਨਾਂ ਠੀਕ ਹੈ ਜੀ ਬਾਹਰ ਬੁੜੀ ਗੱਲ ਕਰਨੀ ਹੈ ਇਹਨਾਂ ਨੇ ਬਾਹਰ ਬੁੜੀ ਨਹੀਂ ਹੈ ਤੇ ਆਂਦਰ ਬੁੜੀ ਬਣਾਤੀ ਬਾਹਰ ਬੁੜੀ ਠੀਕ ਹੈ ਜੀ ਠੀਕ ਹੈ ਜੀ। ਹਾਡੂਰ। ਹਾਡੂਰ। ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ। ਫੇਰੂ ਫੇਰ ਆਣ। ਹਾਂਜੀ। ਫੇਰੂ ਵਸਾਇਆ ਇਹਦਾ ਦਰਦਾ ਵੀ। ਹਾਂਜੀ। ਅੱਗੇ ਅੱਗੇ ਫੇਰੂ ਵਾਲਾ ਬੋਲ ਵਸਾਇਆ ਵਸਾਇਆ। ਕਿੱ데 ਅਛਰੀ ਉਹ ਸਾਲ ਤਾਂ ਬੈਲਾ ਬਸਿਆ ਹੋਇਆ ਹੀ ਸੀ ਉਹ ਦਫਾ ਨੂੰ ਪਛ ਆਇਆ ਸੀ ਨਾਲੇ ਉਹਨਾਂ ਨੂੰ ਜੜਿਆ ਆਇਆ ਸੀ ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ غرੂਰ ਜਪ ਤਪ ਤਰਗਿਲਾ ਜਪਣਾ ਤਪਣਾ ਸੰਜਮਾ ਕੁਛ ਨਹੀਂ ਹਾਂਜੀ ਜਪ ਤਪ ਸੰਜਮ ਨਾਲ ਤੁਦ अच्छा जी हां और मोर मोर गुरूर हां जी और जेड़ा ਗਰੂਰ सी ना गुरूर जब तक सजबले ਨਾਲ ਉਹ कटਿਆ ਗਿਆ अच्छा जी गुरूर ਨਹੀਂ ਹੁੰਦਾ ਆਪਣੇ ਆਪ ਤੇ ਪੈਦਾ ਕਰਨ ਵਾਲਾ ਜੱਤਪਦੀ ਹੈ अच्छा जी ਕੁਫਰ ਜਾਪਾ ਔਕੜ ਵਾਲਾ ਜਪ ਵੀ ਤਪ ਵੀ ਇਹ ਫੇ ਗੁਰਮਤ ਵਾਲਾ ਹੋਇਆ ਨਾ ਆਪ ਦਾ ਜਪ ਹੈਗਾ ਨਾ ਆਪਣੇ ਆਪ ਨੂੰ ਆਪਣੇ ਗੋਲ ਨੂੰ ਜਾਣਣਾ ਨਾ ਥੋੜਾ ਥੋੜਾ ਥੋੜਾ ਥੋੜਾ ਸਰ ਕੇ ਗਿਆਨ ਲਈ ਜਾਣ ਠੀਕ ਜਾਈ ਠੀਕ ਹੈ ਜੀ ਕੀ ਜੀ ਰਬ ਬਿਨਾ ਹੈ ਮਾਨਸਾ ਹਾਂ ਲੱਭ ਬਿਨਾ ਹੈ ਪਾਣੀ ਦਾ ਜੋ ਪਾਣੀ ਫੂੜ ਹਾਂਜੀ ਜਿਹੜਾ ਲੋਭ ਹੈ ਉਹ ਨਾ ਕਰਦਾ ਬੁਧੀ ਦਾ ਬੁਧੀ ਦਾ ਕਰਨ ਵਾਲੀ ਜੀਹਾਂ ਨਾ ਪਾਣੀ ਫੂੜ ਤੇ ਪਾਣੀ ਦੇ ਫੂੜ ਆ ਜਾ ਪਿੰਡ ਦੇ ਘਰ ਰਹਿੰਦਾ ਬਦੂਆ ਹੋਣ ਲੱਗ ਜਾਂਦੀ ਪਾਣੀ ਜੋ ਠੀਕ ਹੈ ਜੀ ਇੱਥੇ ਲੱਭ ਲਿਖਿਆ ਲੱਭ ਲੱਭ ਔਰ ਲੋਭ ਦਾ ਕੀ ਫਰਕ ਹੁੰਦਾ ਜੀ ਲੋਭ ਤਾਂ ਖਰ ਵਕਤ ਦੇ ਆਉਂਦੀ ਹੈ ਅੱਛਾ ਜੀ ਲੱਭ ਜਦੋਂ ਭੋਰੇ ਆਉਂਦਾ ਉਹਦੋਂ ਜਦ ਕੋਈ ਜਲਦੀ ਹੈ ਨਾ ਲੱਭ ਪ੍ਰਗਟ ਹੁੰਦਾ ਜਦ ਪ੍ਰਭਰ ਬੈਰ ਲੋਭ ਹਾਂਜੀ ਜਿਵੇਂ ਲੱਭਦਾ ਵੀ ਹਾਂਜੀ। ਕੋਈ ਜ਼ਿਆਦਾ ਖਾਲੀ। ਹਾਂਜੀ। ਹਾਂ। ਠੀਕ। ਲੰਬ ਕਰਕੇ ਲਓ ਦੋ ਫੇੜਾ ਹੈ ਉਹ। ਠੀਕ ਹੈ ਜੀ। ਹੋ ਗਿਆ ਲੰਬ ਕਰਕੇ ਖਾਲ ਦਾ। ਅੱਛਾ ਜੀ। ਆਹ। ਜੇ ਉਹ ਖਜਾਨੇ ਦੀਆਂ ਵੀ ਦੇ ਨਾਲ ਜੇ ਲੋ ਬੰਦੀ ਪੰਡ ਭਾਈ ਭਾਰੀ ਪਾਲਾ। ਜਿਹੜਾ ਤੂੰ ਲੈ ਜਾ ਤੇਰੇ ਡੇਰਾ। ਅਗੇ ਰਾਜ ਗੜਗੀ ਹਾਂਜੀ ਪਰ ਦਨੋ ਲੋਭ ਦਾ ਲੱਭਾ ਤਾਂ ਆਪੀਆ ਪਰਦੋੰਦੀ ਦਾ ਰੂਪ ਹੋ ਰਿਹਾ ਹਾਂਜੀ ਜਦੋਂ ਨਹੀਂ ਹੈ ਮਤਲਬ ਲੋਭ ਹਮੇਸ਼ਾ ਬੰਦੇ ਚ ਰਹਿੰਦਾ ਪਰ ਜਦੋਂ ਹਾਂਏ ਕੋਈ ਚੀਜ਼ ਦੇਖ ਕੇ ਕਹਿੰਦਾ ਕਰਨੀ ਹੈ ਫੇਰ ਲੱਭ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਅੱਗੇ ਹੈ ਹੁਣ ਵਰੀਏ ਵਰੀਏ ਦਰਗਾਹ ਕੁਦਰਤੀ ਨੂਰ ਕੁਦਰਤੀ ਨੂਰ ਬੰਦਾ ਹੈ ਸਾਟਿਆ ਨੂਰ ਅੱਛਾ ਜੀ ਇਹਦਾ ਕਿਤਾਬ ਦਾ ਸੰਦਤ ਸੇ ਇਹ ਜਿਹੜਾ ਪਹੇਲੇ ਠੀਕ ਹੈ ਜੀ ਇੱਥੇ ਅਖਰ ਗੁਰੂ ਵਰਤਿਆ ਹੁਣ ਗੁਰੂ ਦੀ ਗੁਰੂ ਵਰਤੂ अच्छा जी। ਠੀਕ ਹੈ ਜੀ। ਇਹ ਲਗਾਏ ਜਾਉਣਾ ਪੂਰਾ। اچھا ਜੀ। ਪਹਾੜਾਂ ਤੋਂ ਉਹਦਾ ਕੰਦੀ ਦਰਿਆ ਦਰਗਾਹ ਦਾ ਮਤਲਬ ਹਿਰਦਾ ਵੀ ਹੈ ਨਾ। ਆ ਦਰਗਾਹ ਹੈ। ਠੀਕ ਹੈ ਜੀ। ਜਦੋਂ ਮਾਨ ਨੂੰ ਲਿਆ ਕੇ ਖਾਡੂਰ ਚ ਵਸਾਤਾ ਫਿਰ ਉੱਥੋਂ ਇਹ ਅਸਰ ਹੋਇਆ। ਜੀ ਜੀ ਇਹ ਮਤਲਬ ਜਦੋਂ ਕੋਈ ਉਪਦੇਸ਼ ਦਿੱਤਾ ਜਾ ਰਿਹਾ ਉਹਦੀ ਗੱਲ ਹੋ ਰਹੀ ਹੈ ਕਿ ਉਹ ਸੰਗਤ ਨੂੰ ਜਿਹੜਾ ਉਪਦੇਸ਼ ਹੈ ਉਹ ਨੂਰ ਦੇ ਠੀਕ ਹੈ ਜੀ ਠੀਕ ਹੈ ਜੀ ਜਿੱਤ ਸੋ ਹੱਥ ਨਾਲ ਲੱਭਈ ਤੂੰ ਉਥੇ ਨੂਰ हां जी। तेरे ज्ञानदी था भी लवली। हां जी। हां था था लवली। हां जी। जो बता के है। ठीक है जी। वो था नहीं रहा। बहुत ही गल हो रही है ये लोग आधार ਹਾਂਜੀ ਠੀਕ ਹੈ। ਤਨੂਰ ਵਰਤਦਾ ਹੈ। ਠੀਕ ਹੈ। ਠਰੂਰ ਦਾ ਮਤਲਬ ਕੀ ਹੁੰਦਾ ਆਪ ਜਿਹਦੀ ਬਹੁਤ ਜ਼ਿਆਦਾ ਅੱਛਾ ਰੁਕ ਜਾਣਾ। ਅੱਛਾ ਜੀ। ਰੁਕ ਜਾਣਾ। ਅੱਛਾ। ਸਜਿਤ ਸੋ ਰੋਕ ਦੇਣ ਅੱਛਾ ਜੀ। अच्छा जी। ਕਲਪਨ ਲੋਕ ਦਿੰਦਾ ਹੈ। ਹੂੰ ਹੂੰ। ਨਹੀਂ ਨਹੀਂ ਆਦਾ ਨਹੀਂ। ਹਾਂਜੀ। ਉਹ ਹੋ ਰਿਹਾ ਦਿੰਦਾ ਹੈ। ਬੱਦ ਠੀਵੇ ਦਰਿਆ। ਠੀਕ ਹੈ ਜੀ। ਅਕੜਾ ਕਰ ਦਿੰਦਾ ਬੰਦ ਕਲਪਨ ਲੋਕ ਦਿੰਦਾ ਹੈ। ਠੀਕ ਹੈ ਜੀ। ਨਾ ਨਿਧ ਨਾਮ ਨਿਧਾਨ ਹੈ ਤੁਦ ਭਰਪੂਰ। ਨਾ ਨਿਧ ਨਾਮ। ਤੁਹਾਡਾ ਗਿਆਨ ਦੋ ਦੋ ਦਾ ਨਾਮ ਆਉਂਦਾ ਹੈ। ਅੱਛਾ ਜੀ। ਤੁਹਾਡਾ ਗਿਆਨ ਆਪ ਦਾ ਗਿਆਨ ਦਾ ਭਰਪੂਰ ਹੈ ਭਰਿਆ ਪਿਆ। ਠੀਕ ਹੈ। ਦੇ ਵਿੱਚ। ਤੁਹਾਡਾ ਖਿਆਲ ਨੂੰ ਭਰਿਆ ਪਿਆ। ਠੀਕ ਹੈ ਜੀ। ਵਿਕेश ਵਿੱਚ ਉਹੀ ਆਉਂਦਾ। ਠੀਕ ਹੈ ਨੌ ਦਾ ਮਤਲਬ ਜਿਹੜਾ ਅਖਰ 9 ਐ ਇਹ 9 ਵਾਸਤੇ ਵੀ ਯੂਜ਼ ਹੁੰਦਾ ਕਿ ਸਿਰਫ 9 ਵਾਸਤੇ ਯੂਜ਼ ਹੁੰਦਾ ਜਿੱਦਿ ਦੀਆ ਹੁੰਦੀ 10 ਵਿੱਚ ਫਿਹਰੀਆ ਹਾਂਜੀ ਜਦ ਜਿੱਦਿ ਦੀਆ ਹੁੰਦੀ ਨੂਨ ਦੇ ਦਾ ਨਜ਼ਦੀਕ ਹੀ ਹੁੰਦਾ ਅੱਛਾ ਜੀ ਫਿਰ ਨੂਨ ਅੱਛਾ ਜੀ ਫਿਰ अच्छा जी। ਜਨ ਹਾਲੇ ਦਾ ਉਹ ਕਾਲ ਨੇ ਤੇ ਜੇ ਡੀਕ ਕਵਜਨ ਚਾਈ ਲੱਗੀ ਵਧੀਆ। ਹਾਂਜੀ। ਤੇ ਇਹ ਰਸ ਲਾਈਂ ਲਿਆ ਹੈ। ਇਹ ਰਸ ਤੇ ਦਿਉ ਨਾ ਬੋਲ ਦਿਉ। ਅੱਜ ਪ੍ਰਚਲਿਤ ਨਹੀਂ ਹੈ ਇਹ ਗਿਆਨ ਆਪਰੇ। ਠੀਕ ਹੈ ਜੀ ਇਹ ਨਾ ਹੀ ਹੈ ਸਰਦਾਰਵਾ ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂਰ ਮੇਰਾ ਤੇਰੀ ਦਸਾ ਕਰਦਾ ਉਹਦਾ ਨਾਸ ਹੋ ਜਾਂਦਾ ਹੈ ਚੂਰ ਚੂਰ ਹੋ ਜਾਂਦਾ ਆਪਣਾ ਨਾਸ ਹੋ ਜਾਂਦਾ ਇਕੱਠਾ ਦੀਦਾ ਖਦਾ ਰਹਿ ਜਾਂਦਾ ਉਹ ਜਿੰਦਾ ਬੜਾ ਗਰੁੱਪ ਵੀ ਥੇਰੂ ਥੇਰੂ ਹੋ ਗਏ ਸਾਰੇ ਠੀਕ ਹੈ ਜੀ ਹੋਰ ਹੋ ਜਾਣਗੇ ਬੁਰ ਬਗਲੇ ਦੇ ਵਿੱਚੋਂ ਬੁਰ ਸਾਰੇ ਕੇ ਆ ਜਾਣਗੇ ਬੁਰੂ ਤੇ ਕੋਈ ਖਲਾਫ ਨਹੀਂ ਹੈ ਹਾਂਜੀ ਆ ਸ਼ੱਕ ਪੈਦਾ ਹੋ ਜਾਂਦਾ ਜੁੱਦਾ ਮਾਤ ਲੋਕ ਤੁਦ ਸੁੱਜੈ ਦੂਰ ਆਹ ਮਾਤ ਲੋਕੋਂ ਤਾਂ ਵੇਲੇ ਹੁੰਦਾ ਹਾਂਜੀ ਤੈਨੂੰ ਦੂਰ ਬੋਲ ਤੇ ਤੁੱਦ ਕੌਣ ਐ ਫਿਰ ਇੱਥੇ ਹਾਂ ਤੁੱਦ ਕੌਣ ਐ ਤੁੱਦ ਕਿਹਨੂੰ ਕਿਹਾ ਗਿਆ ਤੂੰ ਤੂੰ ਦੀ ਜੈਸ ਵਿੱਚ ਤੇ ਮੈਂ ਲੱਭ ਇਹ ਦੂਸ਼ੇ ਤੋਂ ਦੇ ਲੈ ਤੈਨੂੰ ਦੂਰ ਹੋਈਦਾ ਨਹੀਂ ਇੱਥੇ ਤੁੱਦ ਇਹ ਆਪਣੇ ਮੂਲ ਵਾਸਤੇ ਆ ਰਹੀ ਹੈ ਗੱਲ ਹਾਂਜੀ ਹਾਂ ਜਿਹੜੇ ਡੇਰਾ ਘਰ ਦਾ ਦੂਰ ਲੱਗ ਦੂਰ ਬੰਦੀ ਬੈਠੇ ਨੇ ਲੋਕ ਐ ਹਾਂਜੀ ਆਪਣਾ ਮੂਲ ਹੈ ਜਿਹੜਾ ਉਹਦਾ ਘਰ ਨਹੀਂ ਦੀ ਏ ਨੇ ਜਿੰਦਿਆਂ ਕਰਨ ਵਾਲੇ ਉਹ ਤਾਂ ਉਹ ਠੀਕ ਪਰਮਾਤਮਾ ਨੂੰ ਪਰਮੇਸ਼ਰ ਕਹਿੰਦੇ ਨੇ ਨਾਲ ਦੀ ਉਹਨੂੰ ਠੀਕ ਹੈ। ਧਾਰਮਿਕ ਅਲਟਾ ਕੋਰ ਵੰਡੀ ਕਰਦੀ ਹੈ। ਉਹ ਨਹੀਂ ਕਰਦੇ। ਉਹ ਤਾਂ ਅਫਸਾਰਾਂ ਦੀ ਗੱਲ ਕਰਦੇ ਨੇ। ਦਰਸ਼ਕ ਦੀ ਗੱਲ ਕਰਦੇ ਨੇ। ਠੀਕ ਹੈ ਉਹ ਹੋਰ ਉਹ ਨਹੀਂ ਉਹ ਬਹੁਤ ਦੂਰੋਂ ਦੇ ਨੇ ਤੇ ਬਤਾ ਲਈ ਨਹੀਂ ਕਰਕੇ ਜਾਦੀ ਉਹ ਤੇ ਪੂਛ ਪੜ ਕੇ ਬਾਅਦ ਖਲੋ ਉਹ ਗੱਲ ਕਹਿ ਰਿਹਾ ਹੈ। ਹੂੰ ਹੂੰ। ਇਹ ਨੇ। ਬਾਦ ਪਰ ਇਹ ਜੇ ਤੁਧ ਸੁਝਿਆ ਦੂਰ ਦਾ ਮਤਲਬ ਇਹ ਹੈ ਵੀ ਲੋਕਾਂ ਨੂੰ ਸਿਰਫ ਮਾਤ ਲੋਕ ਤੱਕ ਦਾ ਹੀ ਗਿਆਨ ਤੇ ਅ ਗੁਰੂ ਅੰਗਦ ਸਾਹਿਬ ਨੂੰ ਅੱਗੇ ਕੀ ਕਹਿੰਨੇ ਪਰਲੋਕ ਦਾ ਗਿਆਨ ਅੱਛਾ ਜੀ ਜੋ ਹਾਂਜੀ ਕੀ ਗੱਲ ਹੈ ਮਾਤ ਲੋਕ ਨੂੰ ਹੂੰ ਤੁਹਾਡੇ ਗ੍ਰੰਥਾਂ ਜਿਹੜਾ ਹੈ ਉਹ ਕਰਦੇ ਜੀ ਨੇ ਅੱਛਾ ਜੀ ਸੋ ਤਾਂ ਉਹਨਾਂ ਦੀ ਗੱਲ ਹੈ ਜਿਹੜੇ ਕਰਦੇ ਠੀਕ ਹੈ ਜੀ ਹਾਂਜੀ ਫੇਰ ਅੱਛਾ ਜੋ ਉਹਨਾਂ ਦੇ ਪ੍ਰਸੰਦ ਚੱਲਿਆ ਸੀ ਉਹਨਾਂ ਦੀ ਉਹ ਹੁਣ ਨਹੀਂ ਠੀਕ ਹੈ ਜੀ ਫੇਰ ਵਸਾਇਆ ਫੇਰਵਾਨ ਸਤਗੁਰ ਖਾੜੂ ਇੱਥੇ ਹਾਂ ਫੇਰ ਵਸਾਇਆ ਠੀਕ ਹੈ ਫਿਰ ਉਹੀ ਗੱਲ ਤੇ ਹਾਂਜੀ ਫੇਰ ਕਹਿੰਦੀ ਹਾਂਜੀ ਉਹ ਨਹੀਂ ਹਾਂ